ਚਲੂਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਨ ਲਪਵੈ ਵਿਚਾਈ ਬਰਨ ਜਪਿਆ ਆਣਿਆ ਕਾਹ ਆਗਲੇ ਬਰਨ ਜਪਿਆ ਜਾਂ ਬੋਲਸ ਆਇਆ ਭਰਿਆ ਇਹ ਕੀ ਸੀ ਭਲ ਭਰਿਆ ਆਇਆ ਸੀ ਭਰਿਆ ਆਗਲੇ ਬੋਲਸ ਭਰਿਆ ਆਏ ਭਰਿਆ ਹੈ ਪਰਮ ਦਾ ਭਰਿਆ ਹੈ ਉਹਦੇ ਦੋ ਪਰ ਪਰ ਅੱਛਾ ਜਦ ਤੂੰ ਪੀਤੇਸ ਤੋਂ ਦੂਰ ਹੋਏ ਹੋ ਗਿਆ ਨਮਤ ਇਹਨੂੰ ਗਿਆਨ ਉਹ ਕਹਿ ਜਾ ਬੇ ਕਹਿ ਜਾ ਗਿਆ ਦੇ ਅੰਦਰ ਚਲਾ ਜਾ ਲੈ ਕਰਦੀ ਏ ਪਰ ਕਿਹੜੇ ਗਿਆਨ ਨਾਲ ਮਤ ਦੂਰ ਹੋਵੇ ਤੇਰੀ ਮਤ ਘਟੇ ਵੀ ਬੁੱਧ ਬਲੀਨ ਹੋਵੇ ਇਹ ਜੇ ਕਿਤਾਰ ਬੋਲਦੇ ਵਿੱਚ ਵੱਲ ਹੋਰ ਵਧੇ ਉਹ ਦੁਰਮਤ ਬੰਦ ਨਹੀਂ ਆ ਲਿਬੜਿਆ ਹੋਇਆ ਸ਼ਰਾਬ ਆਦਿਕ ਦੀ ਭੈੜੀ ਵਾਦੀ ਵਿੱਚ ਪਰ ਇਹ ਹਰੇਕ ਬੰਦਾ ਤਾਂ ਸ਼ਰਾਬ ਨਹੀਂ ਪੀਂਦਾ ਨਾ ਜੀ ਹਰੇਕ ਦਾ ਸ਼ਰਾਬ ਨਹੀਂ ਪੀਦਾ ਇਹ ਤਾਂ ਮਾਨਸ ਭਰਿਆਂ ਹੈਗਾ ਮਾਨਸ ਦੀ ਗੱਲ ਹੈ ਸਾਲ ਬੱਚਾ ਜਦੋਂ ਦਾ ਸੀ ਉਹ ਜੇ ਬੱਚਾ ਪੈਦਾ ਹੋਇਆ ਹੈ ਉਦੋਂ ਦੀ ਗੱਲ ਹੈ ਪਰ ਬਤਾ ਉਹਦੇ ਵਿੱਚ ਉਦੋਂ ਵੀ ਇਹ ਪਰਪਲੀ ਪੂਰਾ ਲੈਦਾ ਹੈ ਸਾਬੇ ਠੀਕ ਹੈ ਨਾਲੇ ਉਹ ਇੱਕ ਗੱਲ ਇਸ ਤਰ੍ਹਾਂ ਨਾਲ ਜੀ ਅਗਲੀ ਜੇ ਪੰਕਤੀ ਗੱਲ ਸੋਚਦੇ ਇਹ ਨਹੀਂ ਪਤਾ ਕਿ ਇਹ ਪੰਕਤੀਆਂ ਜੋ ਹਨ ਉਹ ਚੇਤਨ ਸਰੀਰ ਦੀ ਗੱਲ ਹੈ ਕਿਉਂਕਿ ਜੇਤਨ ਦੀ ਗੱਲ ਹੈ ਜੜ ਉਹਦੇ ਨਾਲ ਕਿਹਦੇ ਵਿੱਚ ਪੈਣੀ ਆ ਕੇ ਜਿੱਦਾਂ ਬੋਲਦੇ ਬਲ ਪੈਣੀ ਬਲ ਦੋਹਰ ਜਪੀ ਹੋਈ ਪਹਿਲਾਂ ਹੀ ਹੈ ਤੇ ਪਈ ਹੋਈ ਐ ਤੇੜ ਰਹੀ ਜਿਹਨੂੰ ਆਪਾਂ ਕਹਿੰਦੇ ਨਾਲ ਹੋਈ ਹੋਈ ਐ ਤੇੜ ਪਈ ਹੋਈ ਐ ਦੁਤੇੜਾ ਕੀ ਕਹੇ ਜੀ ਪਰ ਜੀ ਵਿੱਚ ਤਿਆਦ ਤੋਂ ਤੇੜ ਵਧੇ ਹੈ ਅਜਾ ਪਹਿਲਾਂ ਜਦੋਂ ਆਣਿਆ ਲਿਖਿਆ ਇਹਦਾ ਭਾਵ ਹੈ ਕਿ ਇਸ ਤੋਂ ਪਹਿਲੇ ਜਨਮਾਂ ਚ ਵੀ ਇਹ ਭਰਮ ਦਾ ਹੀ ਭਰਿਆ ਆਇਆ ਸੀ ਤੇ ਹੁਣ ਵੀ ਭਰਮ ਦਾ ਹੀ ਭਰਿਆ ਹੈ ਜੀ ਭਗਵੇਂ ਬੋਲਦਾ ਹੈ ਜੀ ਜੇ ਮਨੁੱਖਾ ਜੋਨੀ ਤੋਂ ਪਹਿਲਾਂ ਵੀ ਇਹ ਭਰਮ ਕਰਕੇ ਆਇਆ ਸੀ ਤੇ ਹੁਣ ਮਨੁੱਖਾ ਜੋਨੀ ਚ ਵੀ ਹੁਣੇ ਭਰਮ ਹੈ ਇਹਨੂੰ ਅਜੇ ਤੱਕ ਜਦੋਂ ਤੇ ਕਰਮ ਕਦੇ ਸਕਦਾ ਕਰਮ ਕਹਿੰਦਾ ਹੀ ਕਰਮ ਲੋਕੀਂ ਕੀ ਆ ਸੰਬੰਧ ਕੀਆ ਦਾ ਜਿਹੜਾ ਖਤਮ ਕਰਤ ਹੈ ਉਹਦੇ ਵੀ ਨਹੀਂ ਸੋਚਾਈ ਹਾਂਜੀ ਇਧਰੋਂ ਉਧਰੋਂ ਸੋਚ ਕੇ ਸੋਚਿਆ ਵੀ ਭਰਿਆ ਦਾ ਭਾਵ ਹੁੰਦਾ ਲਿਬੜਿਆ ਹੋਇਆ ਦੋਵੇਂ ਤੇ ਕਿਤੇ ਅਰੂ ਚਪੜੀ ਕੀਤੀ ਹੈ ਠੀਕ ਹੈ ਜਿਤ ਪੀਤੇ ਮਤ ਦੂਰ ਹੋਏ ਭਾਵ ਸੀ ਕਿ ਜਿਹੜੀ ਦੁਰਮਤ ਆਪਾਂ ਲਈ ਹੋਈ ਹੈ ਉਹਦੇ ਕਰਕੇ ਬਰਲ ਪਈ ਹੈ ਦੇਖੋ ਕਿੰਨੇ ਕਿ ਸੁਬਦੀਆ ਬਕਤਾ ਨੇ ਇੱਕ ਬਕਤਾ ਹੈ ਨਹੀਂ ਜਿਹੜੀ ਬਰਤ ਮਰਜ਼ੀ ਪੈ whatever joot guru ditta hai aro bujhi peeta hai haan ji ik kallan nal pee udharon guruji jan ji hai jehdi kallan nal pee hundi hai oh darri khoolan miti na bitt jayugi oh sharir ਇੱਤ ਵੀ ਤੇ ਬਹੁਤ ਦੂਰ ਦੂਰ ਹੋ ਜਾਣੀਏ। ਜਿੱਤ ਕੋਣ ਮੱਤ ਹੈ ਦੂਰ ਹੈ। ਜਦ ਬੂਰ ਦਾ ਬਲ ਤੋਂ ਜਿੰਨਾ ਟਪਲਾ ਖਾਦਾ ਪਰ ਭਰਿਆ ਅਖਰ ਗੁਰਬਾਣੀ ਦੇ ਜਿੱਥੇ ਵੀ ਆਉਂਦਾ ਹੈ ਉਹ ਤਾਂ ਭਰਿਆ ਹੋਇਆ ਕਾਮ, ਕ੍ਰੋਧ, ਨਗਰ ਬਹੁ ਭਰਿਆ। ਇਸ ਤਰ੍ਹਾਂ ਅੰਤਰ ਕਮਲ ਪ੍ਰਗਾਸ ਅੰਮ੍ਰਿਤ ਭਰਿਆ ਆ गीता समुंद सागर नीर भरया तेते ओगन हमारे अपना पाया ना पहचानई खसमो ठक्के खाई अपना पर ਕਿ ਰੱਬ ਵੀ ਨੇ ਦੇ ਪਰ ਉਹ ਬੰਦੇ ਗਲਤ ਗੱਲ ਹੈ ਤੇ ਬਿਲਕੁਲ ਇਹ ਗਲਤ ਹੈ ਆਪਣਾ ਰਾਇਆ ਅਸੀਂ ਪਛਾਣਦੇ ਹਾਂ ਪਰ ਕੀ ਉਹ ਆਪਣੀ ਕਹੇ ਆਪਣਾ ਨਹੀਂ ਪਾਇਆ ਆਪਣੇ ਕਹਨ ਇਹ ਘਾਰੇ ਆਪਣੇ ਦੇ ਪੁਰਾਣਾ ਹੈ ਇਹਦੀ ਕੋਈ ਨਾ ਕੋਈ ਵੈਰੀ ਕੀ ਹੈ ਆ ਬਾਇਆ ਸਾਰੀ ਫਰਾਈ ਹੈ ਆ ਦੇਹੀ ਆ ਜਿਹੜੀ ਦੇਹੀ ਹੈ ਨਾ ਤੇਰੀ ਦੇਹੀ ਬਾਹਰ ਨਹੀਂ ਪਜਦਾ ਤਾ ਇਹ ਵੀ ਫਰਾਈ ਹੈ ਇਹਨੂੰ ਕਹਿੰਦੇ ਆਪਣੀ ਆਪਣੇ ਬੱਚਿਆਂ ਨੂੰ ਕਹਿੰਦੇ ਆਪਣੇ ਨੂੰ ਇਹ ਆਪਣੇ ਕੋਲ ਤੇ ਪਛਾਣ ਰਖੜੀ ਜੈਦੀ ਦੀ ਜਾਂਦੇ ਲੈਵਲ ਤੇ ਪਛਾਣ ਬਣਦੀ ਬੈਠਾ ਹੈ ਦੇ ਲੈਵਲ ਤੇ ਪਛਾਣ ਤੇ ਬਣਦੀ ਬੈਠਾ ਨੇ ਬਰਾਏ ਦੀ ਪ੍ਰਾਇਦੀ ਪਛਾਣ ਕਿ ਮੇਰੇਗੀ ਤੈਨੂੰ ਫਿਰ ਫਿਰ ਤਾਂ ਮੈਰੀ ਵਗਾਨਾ ਵੀ ਰਹੀ ਆ ਭਾਈ ਤੇਰਾ 13-13 ਵੀ ਰਹੀ ਹੋ ਹੋ ਵੀ ਰਹੀ ਸਭ ਕੁਝ ਇਹ ਆਪਣੇ ਪ੍ਰਾਇਦੀ ਪਛਾਣ ਦੀ ਜੇ ਜੋਤ ਦੇ ਲੈਵਲ ਤੇ ਤੂੰ ਪਛਾਨ ਕਰਦਾ ਫਿਰ ਸਾਰੇ ਆਪਣੇ ਹੀ ਨੇ ਠੀਕ ਹੈ ਕੋਈ ਕਰਦਾ ਤੇ ਪ੍ਰੇਮ ਗੱਲ ਸਿਖਾਈ ਸੀ ਦੇਖ-ਦੇਖ ਕੇ ਕੋਈ ਆਜ ਵੇਖੋ ਜੀ ਅਰੇ ਆਪਣੇ ਕੋਈ ਨਹੀਂ ਠੀਕ ਹੈ ਜੀ ਆ ਖਸਮੋ ਤੱਕੇ ਖਾਈਾ ਧਰੋ ਤੱਕੇ ਜਦ ਆਪਣਾ ਪਿਆਰ ਦੀ ਪਛਾਣ ਲਈ ਉਦੋਂ ਹੀ ਆਪਣੇ ਪ੍ਰਾਇ ਦੀ ਪਛਾਣ ਉਹਦੇ ਜੀਵ ਦੇ ਸਾਰੇ ਉਹਦੇ ਜੀਵਾਂ ਨੂੰ ਤੈਮੰਦੇ ਹੋਈ ਤੂੰ ਆਪ ਕਲਾ ਬਣ ਗਿਆ ਤੂੰ ਦੇ ਦੇ ਉੱਤੇ ਜਾ ਪਛਾਣ ਰੱਖ ਲਈ ਉੱਥੇ ਤਾਂ ਤਾਂ ਹੋ ਠੀਕ ਹੈ ਜੀ ਕਹਿਣ ਦਾ ਭਾਵ ਹੈ ਕਿ ਚੇਤਨਨ ਵਸਤੂ ਤੋਂ ਧਿਆਨ ਹਟ ਕੇ ਜੜ ਚ ਚਲੇ ਗਿਆ ਇਹ ਨਹੀਂ ਪਛਾਣ ਹੋ ਰਹੀ ਬਾਰ ਬਾਰ ਚੱਕ ਕੇ ਚੇਤਨ ਤੇ ਲਿਆ ਰਹੀਏ ਗੁਰਮੁਖੀ ਜੀ ਜਿਤ ਪੀਤਾ ਖਸਮ ਵਿਸਰੈ ਦਰਗਾ ਮਿਲੇ ਸਜਾਏ ਝੂਠਾ ਮਦ ਮੂਲ ਨ ਪੀਚੈ ਜੇ ਕਾ 파ਰਵਸਾ ਕੋ ਜਿਤ ਵੀਤਾ ਖਸਮ ਵਿਸਰੈ ਹਾਂਜੀ ਸਰਕਾਰ ਮਿਲੇ ਸਜ਼ਾਈ ਜੀ ਨਾਲ ਖਸਮ ਵਿਸਰਜ ਮੇ ਸਰਕਾਰ ਸਜ਼ਾ ਗੁਲੇ ਖਸੂਦਾ ਸਾਖਿਆ ਸਾਚੇ ਸਾਖਿ ਮਿਸਰੇ ਜਾਂ ਪਖਾਸੂਦਿ ਸਰ ਇਹ ਸਾਚੇ ਮਿਸਰੇ ਤੇ ਕਿਆ ਖਲਾਬ ਕਦਰ ਵੀ ਖਾਸ ਹੋਵੇ ਸੱਚਾ ਫਜ਼ਹਿਰਾਈਏ ਉਹ ਵੀ ਖਾਸ ਹੋਵੇ ਕੁਝ ਟੂਟਾ ਬਾਦ ਮੂਰਲਾ ਪੀੜੀ ਟੂਟਾ ਬਾਦ ਜੇ ਹੈ ਕੋਈ ਤਾਂ ਸੱਚਾ ਬਾਦ ਦੱਸੋ ਕਿਹੜਾ ਫਿਰ ਦੇਖੋ ਜੇ ਝੂਟਾ ਦਾ ਸੱਚਾ ਵੀ ਨਾ ਹੋ ਸੱਚਾ ਦੱਸੋ ਕਿਹੜਾ ਫਿਰ ਬਿਲਕੁਲ ਅਰਥ ਸ਼ਰਾਬ ਤੋਂ ਭਲਾਫ ਹੈ ਜੋਗੀ ਸ਼ਰਾਬ ਦੇ ਹੱਕ ਚ ਹੈ ਜੋਗੀਆਂ ਨੂੰ ਕਦੇ ਨਾਲ ਜਿੰਦਗੀ ਕਿਹਾ ਸ਼ਰਾਬ ਨੂੰ ਪੀਓ ਹੋਰ ਕੁਝ ਕਿਹਾ ਉਹ ਬੇਇਜ਼ਤ ਅਜਲੂਰਾ ਹੋਰ ਬੰਦਾ ਇਹ ਤਾਂ ਸੱਚੀ ਬਾਣੀ ਐ ਕਿ ਝੂਕੀ ਐ ਸਿਮਰਨ ਵੇਦ ਪ੍ਰਾਣ ਪੋਕਾਰਣ ਪੋਥੀਓ ਨਾਲ ਬਿਨਾ ਸਭ ਝੂਠਾ ਮੰਦ ਸੀ ਉਹ ਪੰਡਤ ਕਦੇ ਕਹਿ ਦਿੰਦਾ ਉਹ ਨੂੰ ਕਿ ਹੈ ਪੰਡਤ ਵੀ ਪੰਡਤ ਕਦੇ ਕਹਿਦਾ ਭਈ ਗੱਲ ਨਹੀਂ ਐਸੇ ਵਾਰ ਮਤਲਬ ਹੁੰਦਾ ਨਾ ਕਲ ਕਲ ਵਾਲੀ ਮਾਇਆ ਮਦ ਇਹਦਾ ਮਤਲਬ ਮਾਇਆ ਝੂਠਾ ਮਦ ਹੈ ਜੀ ਸਾਰੀ ਬਾਇ ਝੂਠਾ ਬੰਦ ਸਰੀਰ ਵੀ ਝੂਠਾ ਹੈ ਬਾਲਾ ਹੇ ਬੁੱਧਿਆ ਜੀ ਜੀ ਜੀਦਾ ਇਹ ਕਹਾਣਾ ਸਾਨੂੰ ਜੀ ਦੁਰਮਤ ਜੋ ਪੀਵਤੇ ਆਹ ਹੈ ਗੱਲ ਅਸਲੀ ਜਿਹੜੀ ਹੁਣ ਤੁਸੀਂ ਕਹੀ ਤੁਰ ਜੇ ਪੀਵਤੇ ਵਿਗਲੀ ਫਤ ਕਮ ਲਈ ਉਹ ਦੁਰਮਤ ਦੂਰ ਕਰਦੀ ਹੈ ਮਤ ਤੁਹਾਨੂੰ ਆਪਣੇ ਕੋਲ ਲਓ ਕੋਇ ਬੰਦ ਸੱਚਾ ਮਦ ਹੈਗਾ ਰਾਮ ਰਸਾਣ ਹਾਂ ਜੀ ਰਾਮ ਰਸਾਣ ਠੀਕ ਹੈ ਜੀ ਝੂਠਾ ਮਦ ਮੂਲ ਨਾ ਪੀਚੇ ਹੀ ਜੇ ਕਾ 파ਰਵਸਾਏ ਅਜਨਾ ਝੂਠਾ ਬੋਲ ਕਰੋ ਹਰੇ ਗੱਲ ਤੇ ਤਰਖ ਕਰੋ ਪਰਖੇ ਖਰੀ ਪਰਖੋ ਇਹਨਾਂ ਤੋਂ ਕੁਝ ਕਹਿੰਦੇ ਔਰ ਉਸ 'ਤੇ ਪਰਖੋ ਹਾਂਜੀ ਨਾਨਕ ਨਦਰੀ ਸੱਚ ਪਾਈ ਪਾਈਐ ਸਤਗੁਰ ਮਿਲਿਆ ਜਿਸ ਆਏ ਆ ਦੇਖੋ ਸੱਚਬੋਧ ਵੀ ਹੈ ਜੇ ਇਰਫਾ ਹੋ ਜਾਏ ਤਾਂ ਸੱਚਬੋਧ ਮਿਲ ਜਾਂਦਾ ਲੋਭ ਬਰ ਦਾ ਫੈਲ ਬਰ ਜਾਂਦਾ ਹਾਂਜੀ ਸਤਗੁਰ ਮਿਲਿਆ ਮਿਲਿਆ ਜੀ ਜੇ ਜੇ ਸਤਗੁਰ ਨੂੰ ਪਹਿਲਾਂ ਮਿਲਦੀਏ ਸੱਚ ਸਤਿਆਮਤ ਮਿਲਦਾ ਹੈ ਤੇ ਲੋਭ ਪਾਇਆ ਜਾਂਦਾ ਰੰਗੀ ਰਹੇ ਮਹਿਲੀ ਪਾਵੇ ਥਾ ਸਦਾ ਸਾਹਿਬ ਕੇ ਨੰਬਰ ਦੇ ਵਿੱਚ ਰੰਗਿਆ ਰਹਿੰਦਾ ਮੈਲ ਦੇ ਵਿੱਚ ਚੋ ਕੋਈ ਕੱਢਦਾ ਦੀ ਮੈਲ ਦੇ ਵਿੱਚ ਇਹਦਾ ਬਿੱਲੀ ਰਹਦੀ ਹੈ ਸਾਚਾਣ ਮੈਲ ਹੈ ਸਾਚਾਣ ਮੈਲ ਹੈ ਬੁੱਧੀ ਨੂੰ ਉਪਦੇਸ਼ ਹੈ ਸਦਾ ਕੇ ਰੰਗੀ ਰਹ ਆਹ ਜਾ ਕੇ ਮੋੜ ਕੇ ਤੇਰੇ ਦੇ ਬੰਤਾ ਪਹਿਲਾਂ ਹੀ ਵਰ ਗਿਆ ਉਹ ਬੰਤਾ ਚਾਹਤ ਇੱਕ ਵਾਰ ਲਿਖ ਜਾਂਦਾ ਉਹ ਬੰਤਾ ਉਹਦਾ ਰਿਹਾ ਬੁੱਧੀ ਦੇ ਵਿੱਚ ਛਾ ਜਿਹੜੀਆਂ ਪੈ ਜਾਂਦੀ ਉਹਦਾ ਲੋਏ ਇਹ ਕੇ ਮੈਨਾਂ ਹੁਰੀਆਂ ਦੀ ਮਾਇਆ ਦੀ ਹੋਰ ਬੁੱਧੀ ਗੁਰਮਖੀ ਹੋ ਗਈ ਬਸ ਠੀਕ ਹੈ ਜੀ ਮਹੱਲਾ ਤੀਜਾ ਇਹ ਜਗਤ ਜੀਵਤ ਮਰੈ ਜਾਂ ਹੋਏ ਜਾਂ ਤਾਂ ਸਭ ਤਾਂ ਸੁਧ ਹੋਏ ਇਹ ਜਗਤ ਆ ਗਿਆ ਲਫ਼ਜ਼ ਜਗ ਜਮ ਤੱਕ ਜੰਗ ਜਲ ਆਇਆ ਜਗਤ ਜਗਰਾ ਕੇਤਨ ਦਾ ਸੁਧ ਹੋਇ ਲੇ ਵਿੱਚ ਹੈ ਤਾਂ ਜਗਤ ਹੈ ਇਹ ਜਗ ਸੱਚੇ ਕੀ ਇਹ ਕੋਠੜੀ ਇਹ ਜਾਗਰਤ ਜੀਵਤ ਬਣੇ ਜਾਗਰਤ ਕਹਿੰਦੇ ਜੀਵਤ ਬਣੇ ਸ਼ਰੀਰ ਚਲਦਾ ਲੇਦਾ ਵਰਗ ਮੇ ਪਿਛਾਬ ਛਰਨ ਆਪਣੀ ਮਰਜ਼ੀ ਤੇ ਆਨਦ ਮੇ ਬਾਹਣੇ ਜਾ ਕੇ ਭੱਜ ਆ ਇਸ ਨੂੰ ਸੋਜੀ ਹੋਏ ਜਦ ਇਹ ਨੂੰ ਹੋ ਜਾਂਦੀ ਹੈ ਨਾ ਸੁਬਜ ਆ ਜਾਂਦੀ ਹੈ ਜੀਵਤਾ ਜਾਂਦਾ ਤੇ ਖਲਦਾ ਵੀ ਇਹ ਤਾਂ ਰੁਕਸਾ ਵਾਲੀ ਚੀਜ਼ ਹੈ ਨੁਕਸਾਨ ਹੋਇਆ ਜੀ ਜਗਨਨਾਥ ਅਫਸਰ ਜਿੰਨਾ ਜਰ ਪਤਾ ਵੀ ਹੈ ਵੀ ਨੁਕਸਾਨ ਹੋਇਆ ਚੁਣੀ ਛੱਡਾ ਸੋ ਜੀਓ ਤੇ ਛੰਦਤ ਜਾਂ ਤਿੰਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਈ ਜਿੰਨੇ ਜੱਲ ਨਾਲ ਸਵਾਇਆ ਹੋਇਆ ਇਹਨੂੰ ਵੀ ਸੁੱਤਾ ਰੇ ਭਾਈ ਸੁੱਤਾ ਹੋਇਆ ਆਪ ਤੇ ਅੰਦਰ ਸਵਾਇਆ ਹੋਇਆ ਬਾਹਰ ਜੁੜਿਆ ਹੋਇਆ ਜੁੜਿਆ ਹੋਇਆ ਜੈਨੂੰ ਜਗਾਉਣਾ ਤੇ ਫੇਰ ਪਤਾ ਲੱਗ ਜੰਦ ਸੋਤ ਹੋਏ ਯਾ ਅੱਗੇ ਉਸਾਰੀ ਸੋਚਿਓ ਜੀ ਵਾਰੀ ਦੇ ਧਾਇਰੇ ਹੀ ਜਗਾਇ ਜਾਗ ਲੈ ਉਹਨੇ ਕਾਫਲ ਸੋਇ ਠੀਕ ਹੈ ਜੀ ਨਾਨਕ ਨਦਰ ਕਰੇ ਜੇ ਆਪਣੀ ਸਤਗੁਰ ਮੇਲੇ ਸੋਇ ਜੇ ਆਪਣੀ ਦ੍ਰਿਸ਼ਟੀ ਆਪਣੀ ਦ੍ਰਿਸ਼ਟੀ ਕਰੇ ਤੇ ਹੁਣ ਜੀਵ ਨੂੰ ਕੀ ਹਾਂਜੀ ਠੀਕ ਹੈ ਜੀ ਆਪ ਜਾਗੇ ਜੇ ਜੇ ਆਪਣੇ ਵੱਲ ਉਦਮ ਕਰਿਆ ਹਾਂ ਜੀ ਉਹੋ ਸੋਤੇ ਵੇਲੇ ਅੱਖ ਪੀਚੀ ਹੋਈ ਹੈ ਜੇ ਜੇ ਆਪ ਸੋਭਣ ਦੇਖਦੇ ਆ ਸੋਭਣ ਸੱਚਾ ਹੁੰਦਾ ਉਹ ਤਾਂ ਠੀਕ ਹੈ ਨਾਨਕ ਨਦਰ ਕਰੇ ਜੇ ਆਪਣੀ ਇੱਥੇ ਪਰਮੇਸ਼ਵਰੀ ਦੇ ਨਦਰ ਕਰੇ ਕਿ ਇਹ ਆਪਣੇ ਆਪ ਤੇ ਆਪਣੀ ਨਜ਼ਰ ਕਰੇ ਕੋਸ਼ਿਸ਼ ਇਹਦੀ ਹੈ ਇੱਛਾ ਇਹਦੀ ਹੈ ਇਹ ਕਰ ਰਿਹਾ ਤੇ ਉਹ ਵੀ ਕਿਰਪਾ ਕਰੇ ਬਸ ਠੀਕ ਹੈ ਜੀ ਆਪ ਤਾਂ ਕੋਸ਼ਿਸ਼ ਕਰੇ ਦੇਖੋ ਜਿੱਥੇ ਤੱਕ ਸਹਿਬ ਦੀ ਦਰਦ ਦੀ ਗੱਲ ਹੈ ਪਰਮੇਸ਼ਰ ਦੀ ਸਭ ਉੱਪਰ ਕਿਰਪਾ ਪ੍ਰਭ ਤੇਰੀ ਕਿਸੇ ਤੇ ਥੋੜੀ ਕਿਸੇ ਪਰ ਹੈ ਕਦੀ ਉਹਦੀ ਤਾਂ ਕਿਰਪਾ ਸਾਰੇ ਉਤੇ ਹੈ ਜਾਦਾ ਪੁਆਇੰਟ ਐਤਲਾ ਜਦੋਂ ਮੇਰੇ ਉਹ ਬੰਦੇ ਜਿਹਾਏ ਤੇ ਬਹੁਤੇ ਖੜੇ ਪੈ ਜਾਂਦੇ ਉਹਦੇ ਚ ਘੇਰੀ ਹੋ ਜਾਂਦੀ ਏ ਥੋੜੀ ਜਿਹੀ ਘੇਰੀ ਕਿੰਦਾ ਵਜ੍ਹਾ ਤੋਂ ਇਹਨੂੰ ਕਿਰਪਾ ਦਾ ਸਾਹੇ ਉਹਦੇ ਦੀ ਅਸੀਂ ਬਿਲਕੁਲ ਇਹ ਗੱਲ ਛੱਡ ਕੇ ਸਾਹਿਬ ਦੀ ਗੱਲ ਪਰਮੇਸ਼ਰ ਦੀ ਕਰਦੀਏ ਫਿਰ ਤਾਂ ਬਿਲਕੁਲ ਹੀ ਗਲਤ ਹੋ ਜਾਣਗੇ ਜੀ ਬਾਤ ਵਾਸਤਾ ਕਿੰਿਓ ਖਰਾਬ ਹੋਵੇ ਉਹਦਾ ਤਾਂ ਫਿਰ ਉਹ ਤਾਂ ਪਾਤਲੀ ਹਜ਼ੂਰੇ ਕੋਈ ਨਹੀਂ ਕੱਲੀ ਉਹ ਬੰਦੀ ਸਾਰੀ ਗੁਰਬਾਨੀ ਦੇ ਖਰਾਬ ਜੀਵਤ ਨਾ ਹੋਏ। ਕਿਆ ਬਣੂਗਾ ਤੇ ਜੀਵਤ ਮਰਜੂਗਾ। ਠੀਕ ਹੈ। ਕੋਈ ਪ੍ਰਕਾਸ਼ ਗਿਆਨ ਦਾ ਪ੍ਰਸਾਦ। ਗਿਆਨ ਭੋਜਨ ਖਾਊਗਾ, ਅਭੁਗਿਆਦੀ ਦਾ ਭੋਜਨ ਗਿਆ। ਉਹ ਜੇ ਗਿਆਨ ਦੇ ਪ੍ਰਸਾਦ ਬਣਾਊਗਾ, ਭੋਜਨ ਬਣਾਊਗਾ, ਸਰੀਰ ਦਾ ਭੋਜਨ ਅਲੱਗ ਗੱਲ ਹੈ। ਜਨਮ ਹੋ ਜਨਮ ਦਾ ਜੁੜ ਨਹੀਂ ਬੁੱਝੂਗਾ ਸਭੇ ਛਾਵਾਂ ਖੜ ਜੂਗਾ ਸੁੱਖ ਨਾ ਹੋਏ ਜੀ ਪਰ ਫੇਰ ਮਰਨਾ ਕਰੂ ਤੁਹਾਡਾ ਬੋਲਣਾ ਨਾਲ ਜੇ ਇਹ ਮਨ ਮਾਰਿਆ ਜਾਊਗਾ ਫੇਰ ਦੁਬਾਰਾ ਇਹਦਾ ਜਨਮ ਮਰਨ ਜਿਹੜਾ ਹੈਗਾ ਉਹ ਦੇਹੀ ਦਾ ਕਟਾ ਕਾਲੂ ਜਾਵੇ ਬੰਦੇ ਜਾਗ ਪੈਣ ਦੇ ਸੁਪਨੇ ਖਤਮ ਹੋ ਜਾਣੇ ਜਾਗ ਪੈਣ ਦੇ ਖਤਮ ਹੋ ਜਾਣ ਫੇਰ ਲੈ ਸੁਪਨਾ ਆਲਿਆ ਬਹੁਤ ਕੁਝ ਹੈ ਕੁਲੀਆਂ ਸਾਡੀਆਂ ਛੋਹ ਗਈ ਤੇ ਸਾਰੇ ਚਾਰੋਂ ਹੀ ਗਦੀਆਂ ਨੇ ਠੀਕ ਹੈ ਜੀ ਪੌੜੀ ਜਿਸ ਦਾ ਦਿੱਤਾ ਸਭ ਕੁਝ ਹੋਵੇ ਤਿਸ ਨੂੰ ਪਰਵਾਹ ਨਾ ਹੀ ਕੋ ਖਾਵੈ ਸਭ ਮੁਹਤਾਜੀ ਕੱਢੈ ਤੇਰੀ ਫੈਸਲ ਗੁਖਾਇਆ ਤੇਰੀ ਪ੍ਰਵਾਹ ਹੀ ਆ ਪਰਮੇਸ਼ਰ ਦਾ ਸਭਾ ਕਿਸੇ ਕੇਰੀ ਲੱਗਿਆ ਹੋਇਆ ਕਿਸੇ ਕੇਰੀ ਜਿਹਨੇ ਸਤਿਗੁਰੂ ਬਣੇ ਹੋਏ ਉਹ ਉਹਦੀ ਗੱਲ ਹੈ ਜਿਹੜਾ ਤਾਂ ਦਾ ਸਿਰ ਬਾਤ ਆਪ ਛੋੜਦਾ ਜਿਹੜਾ ਹਰ ਦਰਗਾਹ ਕੀ ਬਾਤ ਦੱਸ ਰਿਹਾ ਜਿਹੜੂ ਹਰ ਦਾਦਾ ਸਾਰਾ ਸੋਝੀ ਗਿਆ ਉਹਨੂੰ ਹੋਰ ਕੀ ਦੀ ਪਰਵਾਹ ਥਲੇ ਦੇਵੀ ਦੇਵਤੇ ਤੇ ਉਹ ਕੀ ਲੈ ਗਦੇ ਜੀਤੇ ਸਾਰੇ ਤੇਰੇ ਬੁਧਾ ਜਿਹੇ ਤੇ ਤਬ ਗਦੇ ਠੀਕ ਹੈ ਤੇ ਇੱਥੇ ਹਰ ਪਰਮੇਸ਼ਰ ਦੀ ਗੱਲ ਹੈ ਜੀ ਫਲਕ ਇਹ ਇੱਕ ਦੀ ਹੋਦਾ ਹੈ ਕਿ ਉਹ ਜਿਹੜਾ ਉਹ ਹਾਕਮ ਹੈ ਜੋ ਹੁਕਮ ਦਾ ਹੋਦਾ ਇਹ ਹੁਕਮ ਦੀ ਗੱਲ ਹੋ ਰਹੀ ਹੈ ਫਿਰ ਵੀ ਜਿਹੜਾ ਹਾਕਮ ਉਹ ਹੁਕਮ ਤੋਂ ਵੱਡਾ ਹੀ ਹੁੰਦਾ ਕਾਇ ਇਥੇ ਹੁਕਮ ਨੂੰ ਕਿਹਾ ਹਕਮ ਕਿਹਾ ਹਾਂ ਕਬ ਤਾਂ ਫੇਰ ਪਰਮੇਸ਼ਰ ਹੋ ਗਿਆ ਤੇ ਦੱਸਦਾ ਨਹੀਂ ਅਸੀਂ ਜੇ ਤੁਧ ਨੂੰ ਚਲਾਹੇ ਤੋ ਸਭ ਕਿਛ ਪਾਵੇਂ ਜਿਸ ਨੂੰ ਕਿਰਪਾ ਨਿਰੰજન ਕੇਰੀ ਇੱਕ ਨੂੰ ਸੁਲਾਉਣ ਸਾਰੇ ਸੱਚ ਕਰਨ ਨੂੰ ਸੁਲਾਉਣ ਬਰਾਬਰ ਸਾਰੇ ਕੋਈ ਨਾ ਇੱਕ ਦੀ ਸਦਾ ਸੱਚ ਕਰਨ ਦੀ ਸੁਲਾ ਬਰਾਬਰ ਹੈ ਜਿਸ ਨੂੰ ਕਿਰਪਾ ਕੇਰੀ ਨਿਰੰજન ਦੀ ਕਿਰਪਾ ਸੱਚਾ ਵਣਜਾਰਾ ਜਿਨ ਵਖਰ ਲੱਦਿਆ ਹਰ ਨਾਮ ਧੰ ਤੇਰੀ ਆਹ ਹੈ ਬਸ ਹੁੰਦਾ ਇਹਦੇ ਤਰੀਕੇ ਅਜੇ ਦਾ ਸੋਈ ਸਾ ਸੱਚਾ ਬੰਧਾਰਾ ਜਿਹਨ ਵਖਰ ਲੱਧਿਆ ਹਰ ਲੋ ਤੇਰੀ ਇਹਦੇ داری ਤੇਰੀ ਆਇਆ ਕਿਉਂਕਿ ਹਰ ਪਿੱਛੇ ਲੱਗਿਆ ਹੋਇਆ ਹੈ ਜੀ ਆ ਠੀਕ ਹੈ ਲੋ ਉਤਾਨ ਜਿਹਨ ਵਖਰ ਲੱਗੇਰੀ ਹਰ ਨਾਮ ਧੰਨ ਤੇਰੀ ਜੋ ਅਗਲ ਨਹੀਂ ਆ ਨਾ ਕਿਸੇ ਨੂੰ ਨਾ ਹਰਦੇਲੇ ਬੁੱਧੀ ਦਾ ਵਿਸ਼ਾ ਬੁੱਧੀ ਤੇ ਬਿਰੋਧੀ ਕੋਈ ਦੇ ਸਕਦਾ ਬਿਰੋਧੀ ਦੇ ਸਕਦਾ ਨਾ ਲੈ ਸਕਦਾ ਦੇ ਨਹੀਂ ਸਕਦਾ ਠੀਕ ਹੈ ਜੀ ਸਭ ਤਿਸੈ ਨੂੰ ਸਲਾਹਿਓ ਸੰਤੋ ਜਿਹਨ ਦੂਜੇ ਭਾਵ ਕੀ ਮਾਰ ਵਿਡਾਰੀ ਤੇਰੀ ਉਹਦੀ ਸਿਮਤ ਕਰਿਓ ਸੰਤੋ ਜਿਹੜੀ ਦੂਜੀ ਭਾਵ ਹੈ ਨਾ ਦੂਜਾ ਬੋਆ ਦੀ ਇੱਛਾ ਉਹ ਬੋਹਾਈ ਢੀ ਵਾਯਾ ਦੀ ਬੁਢਾਈ ਦੀ ਢੇਰੀ ਪੈਸ ਬੈਸ ਕਰਦੀ ਜੀ ਦੇ ਵਾਇਾ ਦੀ ਬੁਢਾਈ ਦੀ ਛਾਲੀ ਹੈ ਜੀ ਦੇ ਵਾਇਾ ਦੀ ਬੁਢਾਈ ਦੀ ਛਤਾ ਹਕਾਰ ਜੀ ਨੇ ਆਪਣੇ ਉੱਤਰੋਂ ਕਾਲ ਦੀ ਉਹ ਤਲਾਸ਼ੀ ਦੇ ਇਹ ਬੜਾ ਮਿੱਠਾ ਲੱਗਦਾ ਸਾਰੇ ਸੰਤਲੇ ਉਹ ਠੀਕ ਹੈ ਜੀ ਇਹ ਸਤਿਗੁਰੂ ਵੱਲੋਂ ਸੰਤਾਂ ਨੂੰ ਉਪਦੇਸ਼ ਹੈ ਸੰਤ ਤੋਂ ਉਪਦੇਸ਼ ਮਿਲ ਰਿਹਾ ਇੱਥੇ ਨੇ ਲੈ ਲੈਂਦੇ ਤੇਰਾ ਪਤਾ ਹੀ ਹੈ ਕੀ ਠੀਕ ਹੈ ਜੀ ਇਹ ਤਾਂ ਸਿਰਫ ਕੱਪੜਿਆਂ ਵਾਲੇ ਸੰਤਾਂ ਵੀ ਕੱਪੜੇ ਪਾ ਕੇ ਸੰਤ ਬਣ ਜਾਂਦੇ ਆ ਜੇ ਕੱਪੜੇ ਨਾ ਹੋਣ ਤਾਂ ਫੇਰ ਇਹਨਾਂ ਕੋਈ ਸ਼ਾਇਦ ਨਮਸਕਾਰ ਵੀ ਨਾ ਕਰੇ 5000 ਰੁਪਏ ਨੂੰ ਸੰਤ ਬਣ ਜਾਂਦਾ ਅੱਛਾ ਜੀ ਕਹਿੰਦਾ ਮੈਂ ਕਿਹਾ ਭਾਈ ਇੱਕ ਸੰਤ ਬਣ ਜਾਏ ਹੁੰਦਾ ਫਿਰ ਮੈਨੂੰ ਤਾਂ ਟਾਈਮ ਤੇ ਗੱਲ ਹੈ ਬਣਦਾ ਹੈ ਹੁੰਦਾ ਫਰਕ ਕੀ ਹੈ ਜਿਹੜਾ ਹੁੰਦਾ ਉਹਨੂੰ ਪਾਉਣ ਦੀ ਲੋੜ ਨਹੀਂ ਪੈਂਦੀ ਜੇ ਹੁੰਦਾ ਤਾਂ ਵੇਖ ਦੀ ਲੋੜ ਕਿਉਂ ਹੈ ਤੇ ਵੇਖ ਕਿਉਂ ਪਿਆ ਠੀਕ ਹੈ ਜੀ ਇੱਥੇ 16ਵੀਂ ਪੌੜੀ ਦੀ ਸਮਾਪਤੀ ਹੈ